चलोक ਲੋਕ ਮਹੱਲਾ ਤੀਜਾ जना को आप ਆਪ मेरा प्यारा आप ਆਪੇ ਲਈਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤੀਨ ਫਿਰ ਛੱਤ ਸੱਚਾ ਹਰ ਬਣਾਏ ਦੇ ਕੋਈ ਤੇ ਦੋ ਗਲਤੀਆਂ ਆ ਗਈਆਂ ਇਹਦੇ ਵਿੱਚ ਅੱਛਾ ਜੀ ਇੱਕ ਤਾਂ ਗਲਤੀ ਇਹ ਆ ਗਈ ਕੱਕੇ ਦੇ ਉੱਤੇ ਟਿੱਪੀ ਲਾਈ ਇਹ ਕੋਈ ਹਾਂ ਗਲਤੀ ਹੈ ਨਾ ਪ੍ਰਿੰਟਿੰਗ ਦੇ ਵਿੱਚ ਹਾਂਜੀ ਦੂਜੀ ਗੱਲ ਇਹ ਹੈ ਭਗਤ ਜਨਨ ਦੇ ਨਾਲ ਲੱਗਿਆ ਹੋਇਆ ਸੰਤ ਜਨਨ ਵੇਲ ਹਰਿ ਜਸ ਗਾਇਓ ਇੱਕ ਭਗਤ ਬਲੇ ਹਿਰਦੇ ਵਸਾ ਜਿਹੜਾ ਅੰਦਰ ਵਸਦਾ ਉਹ ਭਗਤ ਹੁੰਦਾ ਧਰਜੀ ਪ੍ਰਾਤਮਾ ਆਪਾਂ ਕਹਿੰਦੇ ਕਿਤ ਹਾਂਜੀ ਹਾਂਜੀ ਉਹਨੂੰ ਭਗਤ ਕਿਹਾ ਹੋਇਆ ਜਾਂ ਨਾਲ ਲੱਗ ਜਾਂਦਾ ਜਿਹੜਾ ਮਾਨ ਹੈ ਜਦੋਂ ਗਿਆਨवान ਹੁੰਦਾ ਹੈ ਨਾਅ ਮਿਰਜਾ ਜਾਂਦਾ ਸਹਿਮਤ ਹੋ ਜਾਂਦਾ ਇੱਕ ਮਤ ਹੋ ਜਾਂਦੇ ਭਗਤ ਦੇ ਨਾਲ ਫਿਰ ਭਗਤ ਜਨਨਲ ਅਫਜ਼ਲ ਲੱਗਦਾ ਅੱਛਾ ਜੀ ਇਹ ਧਿਆਨ ਰੱਖਣ ਬਹੁਤੇ ਸੰਤਾਂ ਨੇ ਹੱਜ ਅੱਜਾਇਆ ਮਿਲ ਕੇ ਨਾ ਨਾ ਇੱਕ ਵੰਨ ਇੱਕ ਹੋ ਗਿਆ ਹੱਜ ਅੱਜਾਇਆ ਜਾਂਦਾ ਮਤਲਬ ਇਹ ਹੈ ਜਿਹਦੇ ਵੀ ਹੱਜ ਅੱਜਾਇਆ ਕਲੀ ਨੇ ਗਾਇਆ ਕਬੀਰ ਨੇ ਗਾਇਆ ਇਹ ਆ ਮਤਲਬ ਹੈ ਨਾਨਕ ਨੇ ਗਾਇਆ ਆ ਕਿਸੇ ਵੀ ਪੱਟ ਨੇ ਗਾਇਆ ਹੈ ਗਾਇਆ ਤਾਂ ਉਹਨੇ ਇਕੱਲੇ ਨਹੀਂ ਆਣਾ ਹਾਂਜੀ ਲਿਖਿਆ ਹੋਇਆ ਸੰਤ ਜਨਾ ਮਿਲ ਹਰਜਸ ਗਾਇਓ ਜਨਤਾ ਮੰਨ ਬਣਿਆ ਹੋਇਆ ਲਫਜ਼ ਅੱਗੇ ਆਪਣੀ ਗੱਲ ਹੋਈ ਹੋਈ ਹੈ ਬਸ ਗੱਲ ਆਪਾਂ ਨੇ ਕਰਦੀ ਸੀ ਤਾਂ ਕਿ ਆਮ ਆਸ ਨੂੰ ਇਹਦਾ ਪਤਾ ਲੱਗ ਜੇ ਇੱਕ ਗੱਲ ਦੂਜੀ ਗੱਲ ਇਹਦੇ ਚ ਕੋ ਆਪ ਤੁਠਾ ਮੇਰਾ ਪਿਆਰਾ ਕਿਦੇ ਕੋਈ ਸ਼ੁੱਧ ਕਾੜੀ ਮੇਰਾ ਪਿਆਰਾ ਪਰਮੇਸ਼ਰ ਆਪ ਤੁਠਾ ਉਹਦੇ ਉੱਤੇ ਉਹਨੇ ਬੇਰ ਕੀਤੀ ਉਹਨੇ ਫਰਮਾਨ ਕੀਤਾ ਉਹਨੇ ਬੁਲਾਇਆ ਤੇ ਬੋਲੇ ਆਪੇ ਲਿਆਂ ਜਾਂ ਆਪੇ ਲਿਆਂ ਇਹ ਪੜ ਲੋ ਆਪੇ ਜਨਾਂ ਨੂੰ ਨਾਲ ਲਾ ਲੈ ਆਪਣੇ ਜਨਾਂ ਨੂੰ ਆਪਣੇ ਨਾਲ ਆਪ ਜੋੜ ਲਿਆ ਆਤਿ ਭਗਤ ਜਨਾਂ ਕੋ ਦਿੱਤੀ ਉਹ ਛੱਤ ਸੱਚਾ ਹਰ ਬਣਾਇਆ ਇੱਥੇ ਪਾਤਸ਼ਾਹੀ ਦਾ ਲਫ਼ਜ਼ ਆਇਆ ਪਾਤਸ਼ਾਹੀ ਬਹੁਤ ਇੰਪੋਰਟੈਂਟ ਲਫ਼ਜ਼ ਹੈ ਤਾਂ ਪਾਤਸ਼ਾਹੀ ਕਿੱਥੇ ਵੀ ਆ ਗਿਆ ਜਵਜੀ ਸਾਹਿਬ ਤੇ ਆ ਗਿਆ ਸੀ ਜਿਸ ਨੂੰ ਬਖਸ਼ਿਆ ਉਹ ਜਿਹੜੀ ਦਸਵੀਂ ਪਾਤਸ਼ਾਹੀ ਲਿਖੀ ਹੈ ਨਾ ਦਸਮ ਗ੍ਰੰਥ 'ਚ ਸਬੂਤ ਮਿਲ ਗਿਆ ਸਾਡੇ ਕੋਲ ਪਾਤਸ਼ਾਹੀ ਉਹਨਾਂ ਨੇ ਮਹੱਲਾ ਨਹੀਂ ਵਰਤੀਆ ਪਾਤਸ਼ਾਹੀ ਵਰਤੀ ਠੀਕ ਹੈ ਆਰ ਜਾਈ ਦਾ ਭਗਤੇ ਹੁੰਦਾ ਲਖ ਅਰਥ ਭਗਤ ਦਾ ਪਾਸ਼ਾ ਹੁੰਦਾ ਪਾਸ਼ਾ ਦਾ ਮਤਲਬ ਭਗਤ ਹੁੰਦਾ ਉਹ ਜਿਹੜਾ ਕਹਿਣਾ ਹੈ ਨਾ ਮਹਲਾ ਕਿਉਂ ਨਹੀਂ ਵਰਤੀਆ ਪਾਸ਼ਾ ਕਿਉਂ ਵਰਤੀ ਹੈ ਉਹਦਾ ਆ ਤੁਹਾਡੇ ਕੋਲ ਜਵਾਬ ਕੌ ਅੱਖਰ ਹੈ 21 ਵਾਰ ਗਲਤੀ ਹੋਈ ਹੋਈ ਹੈ ਜੀ ਇਹ ਆਹੋ ਮੈਂ ਸਮਝ ਗਿਆ ਤੁਹਾਡੀ ਗੱਲ ਬਈ ਇਹ ਦੇਖੋ ਮੈਂ ਸਪਰਿੰਟ ਹਰ ਦਰਸ਼ਨ ਕੌ ਮਨ ਤਾਂ ਹੁੰਦਾ ਨਹੀਂ ਹਰ ਦਰਸ਼ਨ ਕੌ ਮਨ ਲੋਚਦਾ ਹੋਏਗਾ ਬਿਲਕੁਲ ਬਿਲਕੁਲ ਬਿਲਕੁਲ ਇਹ ਟਿੱਪੀਆਂ ਫालतੂ ਦੀਆਂ ਲਾਈਆਂ ਹੋਈਆਂ ਔਰ ਗਲਤ ਲੱਗੀਆਂ ਹੋਈਆਂ। ਕੋਈ ਜਗ੍ਹਾ ਬੰਦੀਆਂ ਲਾਈਆਂ ਨੇ ਐਵੇਂ ਕਈ ਜਗ੍ਹਾ ਹਟਾਤੀ ਹਾਂਜੀ ਇਹ ਮਗਬੂਲੀ ਗੱਲਾਂ ਨੇ ਜਦੋਂ ਆਪਾਂ ਨੂੰ ਟਰੈਕ ਦੀ ਸਮਝ ਆ ਜਾਂਦੀ ਹੈ ਨਾ ਗੁਰਬਾਦੀ ਸੋਚੀ ਆ ਜਾਂਦੀ ਹੈ। ਫਿਰ ਇਹ ਗੱਲਾਂ ਬਹੁਤੀਆਂ ਲੁਪਿਆ ਸ਼ੌੜੀਆਂ ਰਹਿੰਦੀਆਂ ਵਿਦਵਾਨਾਂ ਦਾ ਵਿਦਵਾਨਾਂ 'ਤੇ ਵੀ ਝਗੜੀ ਜਾਂਦੇ ਨੇ ਫਜ਼ੂਰ ਗੱਲਾਂ 'ਤੇ। ਤੇਰੇ ਗੱਲਾਂ ਨੂੰ ਭੁੱਲੀ ਰਹਿ ਜਾਂਦੀ ਹਾਂ ਠੀਕ ਹੈ ਜੀ ਭਗਤ ਜਨਾ ਕੋ ਆਪ ਤੁੱਥਾ ਮੇਰਾ ਪਿਆਰਾ ਆਪੇ ਲੈਨ ਜਨ ਲਾਈ ਤੇ ਕਾਰੇ ਲਾਉਗਾ ਬੂੜੂ ਕਾਰੇ ਲਾਇਆ ਇਹਨਾਂ ਦੇ ਮਨ ਨੂੰ ਕਾਰੇ ਜਿਵੇਂ ਉਹ ਰਵਦਾਸ ਕਹਿੰਦਾ ਮੇਰੇ ਬਾਥੇ 77 ਹੈ ਐਸਾ ਛਤਰ ਰੱਖਿਆ ਜੁਗੋ ਜੁਗਾ ਟਾਲ ਛਤਰ ਰੱਖ ਦਿੱਤਾ ਐਸੀ ਪਾਕਸ਼ਾਈ ਦੇਤੀ ਸਦਾ ਪਾਕਸ਼ਾਈ ਜਿਹੜੀ ਰਹਿਣ ਵਾਲੀ ਠੀਕ ਹੈ ਜੀ ਹਾਂਜੀ ਸੱਤੇ ਬਲਵੰਡੇ ਦੀ ਵਾਰ ਚ ਵੀ ਹੁੰਦਾ ਨਾ ਲੈਣੇ ਧਰੇ ਔਨ ਜੀ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਉਹ ਸਾਡੇ ਕੋਲ ਨਰਮਲੇ ਦੀ ਆ ਡੈਫੀਨੇਸ਼ਨ ਆ ਗਈ ਉਹ ਕਹਿੰਦਾ ਨੇ ਅਸੀਂ ਨਿਰਮਲੇ ਨੇ ਉਹ ਸਦਾ ਸੁਖੀਏ ਨੇ ਨਿਰਮਲੇ ਦੇ ਉਹਨਾਂ ਦੇ ਮਨ ਨੂੰ ਮੈਲ ਲੱਗਦੀ ਹੋਈ ਦੀ ਬੰਨ ਕਰਕੇ ਨਰਮਲੇ ਹੈ ਸਦਾ ਹੀ ਸੁਖੀ ਹੈ ਜਿੰਨਾ ਜਰ ਮਨ ਨਰਮਲ ਸੁਖਾ ਜਦ ਮਨ ਮੈਲ ਲੱਗੀ ਦੁਖੀ ਹੋ ਜੀ ਸਤਗੁਰ ਕੀ ਕਾਰ ਕਰ ਦੇ ਭਾਣੇ ਚੱਲਦੇ ਹਾਂਜੀ ਰਾਜੇ ਹੋਏ ਨਾ ਆਖੀਐ ਭੀੜ ਮਰੇ ਫਿਰ ਜੁਨੀ ਪਾਹੀ ਗੁਰਮਖਾਨ ਉਹ ਨਹੀਂ ਆਉਣਾ ਉਹਨਾਂ ਨੂੰ ਰਾਜੇ ਬਣਾਣਾ ਚਾਹੀਦਾ ਜਿਹੜੇ ਆਹ ਸੂਚੀ ਭੜਕੇ ਪਰਦੇ ਆ ਦੇਖੋ ਇਹਦੇ ਸਾਰੇ ਲੜਾਈ ਹੈ ਨਾ ਦੀ ਸਾਜਖੰਡ ਦੇ ਵਿੱਚ ਜਿੰਨੇ ਵੀ ਭਗਤ ਰਹਿ ਕੋਈ ਲੜਦਾ ਭੜਦਾ ਐ ਸੰਸਾਰ ਦੇ ਵਿੱਚ ਲੜਾਈ ਪੜਾਈ ਉਹ ਪਾਕਸ਼ਾ ਕਾਗਰੂ ਹੁੰਦੇ ਨੇ ਜਿਹੜੇ ਭੜਦੇ ਨੇ ਲੜ ਲੜ ਆਪਸ ਵਿੱਚ ਜਿਉਂ ਦੀ ਲੜਾਈ ਆ ਉਹ ਗੁਰਮਖੰਦੀ ਸਿੱਖਾਂ ਦੀ ਲੜਾਈ ਹੁੰਦੀ ਆ ਆਪਸ ਵਿੱਚ ਪਿੰਡ ਪੜਾ ਫਿਰ ਆਪ ਫਿਰ ਜੂਨੀ ਪਾਏ ਲੜ ਜਨਮ ਲੈ ਲੈਂਦੇ ਨੇ ਇਹ ਆਜੇ ਦੀ ਯੁੱਧ ਕਹਿੰਦੇ ਹਾਂ ਰਾਜ ਖਾਲਸਾ ਵਾਲੀ ਕਿੱਥੇ ਗਈ ਗੱਲ ਹੋ ਗਈ ਨਾ ਉਹ ਪੈਰ ਪੈਰ ਤੇ ਬਾਣੀ ਵਿਰੋਧ ਕਰ ਦਿਓ ਉਸ ਗੱਲ ਦਾ ਜਿਹੜੀ ਗੱਲ ਦਾ ਪ੍ਰਚਾਰ ਇਹਨਾਂ ਨੇ ਕੀਤਾ 2300 ਪਰ ਪਰ ਤੇ ਬਾਂਝੋ ਦਾ ਬਰੋਧ ਕਰ। ਠੀਕ ਨਾਨਕ ਬੇਣ ਨਾਮ ਹੈ। ਨੱਕੀ ਵੱਡੀ ਫਿਰੈ। ਸੋਭਾ ਮੂਲ ਨਾ ਪਾਹੀਂ। ਕਹਿੰਦੇ ਇਹਨਾਂ ਦੇ ਬੱਲੇ ਨਾਮ ਨਹੀਂ ਲਗੋ। ਨੂੰ ਕੋਈ ਸੋਭਾ ਨਹੀਂ ਸੰਸਾਰ ਮਿਲ ਸਕਦੀ। ਐਵੇਂ वायन चेले, ਨਚਣ ਗੋਰ ਪੈਰ ਹਲਾਇਨ ਫੇਰ ਤੇ ਸਿਰ ਉਹ ਜਿਹੜੇ ਸੀ ਇਹ ਰੋਟੀਆਂ ਕਾਲਪੂਰੇ ਤਾਲ ਆ ਪਛਾੜਣ ਕਰਤੀ ਨਾਲ ਆ ਭੁੱਖੇ ਗੁੱਲਾਂ ਘਰੇ ਰਸੀਤ ਕਹਦੇ ਕੋਈ ਉਹਨਾਂ ਦੀ ਸੋਭਾ ਸੰ ਰਹਿੰਦੀ ਪਿੱਛੂ ਹਾਂਜੀ ਮਹੱਲਾ ਤੀਜਾ ਸੁਣ ਸਿੱਖੀ ਹੈ ਸਵਾਦ ਨ ਸਿੱਖਿਆ ਦਾ ਸੁਣ ਲਈ ਗੁਰੂ ਦੀ ਕੁਰਬਾਨੀ ਦਾ ਸੁਣ ਲਈ ਉਹ ਜੋ ਟੇਸਟ ਆਇਆ ਸਾਦ ਆਇਆ ਇਹ ਨਹੀਂ ਦੇਖਿਆ ਵੀ ਇਹਦਾ ਰਿਜ਼ਲਟ ਕੀ ਹੋਊਗਾ ਸਾਦ ਨਾ ਆਇਓ ਤਾਂ ਆਦ ਨਹੀਂ ਲੱਗੇ ਬਾਣੀ ਠੀਕ ਹੈ ਇੱਥੇ ਵੀ ਵਾਹ ਵਾਹ ਇਹਨਾਂ ਨੇ ਕੱਟਿਆ ਹੋਇਆ ਵੈਸੇ ਸੋਣ ਸਿੱਖੀ ਹੈ ਸਵਾਦ ਨਾ ਆਇਓ ਜਿੱਚਰ ਗੁਰਮੁਖੀ ਸ਼ਬਦ ਨਾ ਲੱਗ। ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਬੁਝੀ ਲੀ ਗਾਲ ਇੱਕ ਕਾਸ਼ ਤੇ ਗੁਰਮੁਖੀ ਸ਼ਬਦ ਨਾ ਲੱਗ ਹੈ। ਜਿੱਚਰ ਸ਼ਬਦ ਨਾ ਲੱਗਾ ਜੁੜਦਾ ਨਾ ਉਹਨਾਂ ਚ ਰੂਹ ਕੱਲ ਸੋਹਣੇ ਉਦਲੇ ਕੱਢ ਕੱਢਦੀ। ਉਹ ਚਾਰੀਓ ਹੈ। ਉਹ ਦੇ ਬਿਨਾ ਹੋ ਕੇ ਕੁਛ ਨਹੀਂ ਪਿਛਾਰੇ ਤੇ ਬਿਨਾਈ ਰੱਦ ਕਰਤੀ ਹਾਂਜੀ ਸਤਿਗੁਰ ਸੇਵੀਏ ਨਾਮ ਮਨ ਵਸੈ ਵਿੱਚੋਂ ਬ੍ਰਹਮ ਭਉ ਭਗ ਹੈ ਕਰੇ ਬੰਦੀ ਗੱਲ ਉਹ ਬਾਣੀ ਕਹਿੰਦੇ ਨਾਮ ਬੰਦ ਵਿੱਚ ਵਸ ਜਾਂਦਾ ਫਿਰ ਜਿਹੜਾ ਗਿਆਨ ਹੈ ਨਾ ਹਾਂਜੀ ਬੰਦ ਵਿੱਚ ਵਸ ਜਾਂਦਾ ਬੰਨੂ ਕੱਟ ਦਿੰਦਾ ਹਾਂ ਜਦੋਂ ਦਾ ਮਨ ਆਪੇ ਹੀ ਛੱਡ ਦਿੰਦਾ ਸਭ ਕੁਝ। ਕਿਹ ਮਨ ਬਸਦਾ ਨਾ ਨਾ ਜਦੋਂ ਗਿਆਨ ਨੂੰ ਕਹਿੰਦੇ ਪਹਿਲੀ ਸਟੇਜ ਵਿੱਚ ਨਾਮ ਆਉਂਦਾ ਠੀਕ ਹੈ ਮਨ ਦੇ ਵਿੱਚ ਤਾਂ ਬਸਦਾ ਹੀ ਨਹੀਂ ਆ ਕਬਦ। ਹੂੰ ਜੇ ਕੋ ਖੁੱਚਾ ਉਹ ਹਜਮ ਤਾਂ ਹੋਈ ਹੋਈ ਨਹੀਂ ਨਾ ਹਜਮਾ ਨਹੀਂ ਕੀਤੀ ਤੇ ਭਰਮ ਪਾਉ ਜਾਏ। ਉਹੜਾ ਪਰਮਾਣਾ ਯਾਰ ਨਾ ਵਿਗੜ ਜਾਇਆ ਉਹ ਨਾ ਹੋ ਜਾਏ ਨਿਆਣਿਆਂ ਨੂੰ ਰੋਟੀ ਖਾਣੀ ਮਿਲੂਗੀ ਕਲੀ ਨਹੀਂ ਖੀਊਗੀ ਇਹ ਪਰਮ ਦਾ ਜਿਹੜਾ ਭੂਤ ਪਾਉ ਬਣਿਆ ਹੋਇਆ ਡਰ ਬਣ ਆਇਆ ਆਪੇ ਚ ਜਾਂਦਾ ਇਹ ਉਹ ਭਾਣੇ ਨਾਲ ਬਣਨਾ ਸਭ ਕੁਝ ਨਾਨਕ ਕਹਿੰਦਾ ਚਿੰਤਾ ਮਤ ਕਰੋ ਚਿੰਤਾ ਤੁਸੀਂ ਉਹ ਸਾਰਿਆਂ ਦੀ ਚਿੰਤਾ ਉਹ ਨੂੰ ਜਿਹਨੇ ਪੈਦਾ ਕੀਤੀ ਤੁਸੀਂ ਚਿੰਤਾ ਸਾਡੇ ਕਰਦੇ ਹੋ ਚਿੰਤਾ ਛੁੱਟ ਜਾਂਦੀ ਹੈ ਫਿਰ ਪਰਮ ਪਹੁੰਚਾਏ ਪਰਮ ਪਉ ਭੱਜੇ ਆਹ ਪਰਮ ਪਉ ਭੱਜੇ ਇਹ ਜੇ ਜੇ ਸਤਗੁਰੂ ਨੂੰ ਤੇ ਹੋ ਹੋਵੇ ਤਾਂ ਸੱਚ ਨਾਮ ਲਿਵ ਲੱਗ ਗਏ ਜੇ ਤਾਂ ਸਤਗੁਰੂ ਨੂੰ ਸੱਚਾ ਕਰਕੇ ਜਾਣ ਲਵੇ ਸਤਗੁਰੂ ਦੀ ਬਾਣੀ ਨੂੰ ਨਾ ਜੇ ਜੇ ਸਤਗੁਰੂ ਨੂੰ ਜਾਣਦਾ ਤਾਂ ਉਹ ਜੇ ਹੋਣਾ ਸੱਚਾ ਜਾਣਦਾ ਸੱਚਾ ਜਾਣਦਾ ਸੱਚਾ ਸਤਗੁਰੂ ਮੰਨਦਾ ਰਹਿਣਾ ਤਾਂ ਜੇ ਭਰੋਸਾ ਨਹੀਂ ਕਰਦਾ ਕੂੜਿਆਰਾ ਰਹਿ ਜਾਂਦਾ ਤੇ ਹੋਵੇ ਤਾ ਸੱਚ ਨਾਮ ਨਿਭ ਲਾਇ। ਜੇ ਸੱਚਿਆਰਾ ਕਰਕੇ ਬੰਦਦਾ ਸੱਚ ਬੋਲਦੇ ਹੀ ਬੰਦੇ ਭਰੋਸਾ ਕਰਦਾ ਤਾਂ ਸੱਚਿਆਰਾ ਬੰਦ ਸੱਚ ਨਾਮ ਨਿਭ ਲੱਗਦੀ ਐ। ਤਾਂ ਤਾਂ ਆਪਾਂ। ਜੇ ਜਿਨ੍ਹਾਂ ਨੇ ਬਾਣੀ ਤੇ ਭਰੋਸਾ ਨਹੀਂ ਕੀਤਾ ਉਹਨੂੰ ਤੇ ਕੋਈ ਅਸਰ ਨਹੀਂ ਪੈਂਦਾ। ਲੱਗ ਜਾਂਦੀ ਐ ਸਬਦੀ ਉਹ ਹੀ ਇਹ ਆਖਿਓ ਵੀ ਲੱਗ ਨਹੀਂ ਸਕਦੀ। ਉਹ ਕਹਿੰਦੇ ਸਬਦੀ ਉਹ ਲੱਗ ਜਾਂਦੀ ਐ ਇਹ ਲਿਖ। ਕੋਈ ਐਵੇਂ ਕਹਿ ਸਕਦਾ ਜੀ ਸਾਡੇ ਕਿੱਥੇ ਵਸਦੀ ਗੱਲ ਐ। ਹਾਂ ਲੈ ਇਹ ਗੱਲਾਂ ਬਿਲਕੁਲ ਨੇ ਜਿਹੜਾ ਵੀ ਸਤਗੁਰ ਦੀ ਬਾਣੀ ਨੂੰ ਸਤ ਸਤ ਕਰਕੇ ਮੰਨ ਲਵੇ ਉਹਦੀ ਉਹ ਲੇਵ ਚਾਹੀਦਾ ਠੀਕ ਹੈ ਜੀ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੈ ਨਾਨਕ ਆਪਲੇ ਵਡਿਆਈ ਉਹ ਤੋਂ ਦੇਖੋ ਜਾ ਲੈਵ ਲੱਗ ਜਾਂਦੀ ਐ ਫੇਰ ਨਾਮ ਦੀ ਵਡਿਆਈ ਵੱਧਦੀ ਐ ਫੇਰ ਨਾਮ ਮਿਲਦਾ ਦਰਗਾਹ ਚ ਉਹ ਨਾਮ ਦੀ ਐ ਵਡਿਆਈ ਫੇਰ ਤਾਂ ਉਹ ਵਡਿਆਈ ਸੋਭਾ ਕਰਦਾ ਆ ਆ ਵਡਿਆਈ ਕੀਤੀ ਐ ਨਾਨਕ ਨੇ ਦੀ ਬੜੇ ਵਡਿਆਈਆਂ ਕੀਤੀਆਂ ਨੇ ਜਾਂ ਨਾਮ ਮਿਲਦਾ ਫੇਰ ਵਡਿਆਈ ਕਰਦਾ ਉਹ ਫੇਰ ਉਹ ਗੁਰਬਾਨੀ ਰਚਦਾ ਨਾਨਕ ਨਾਮ ਬਿਲਾ ਵਡਿਆਈ ਅਖੇ ਸਾਹਿਬ ਮਿਲਦਾ ਵਡਿਆਈ ਕਰਦਾ ਉਹ ਬੁਢਾਈ ਉਹਦੀ ਵੀ ਰਹਿੰਦੀ ਆ ਫਿਰ ਹੋ ਜਾਂਦੀ ਆ ਆਪ ਵੀ ਤਾਂ ਸਿਰ ਆਪ ਦਾਸ ਕਾ ਹੁੰਦਾ ਪਾਦਸ਼ਾਹ ਸੱਚੇ ਪਰਮੇਸ਼ਰ ਦਾ ਹੁੰਦਾ ਆਪ ਦਾਸ ਕਾ ਉਹ ਦਰਗਾਹ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਦਾ ਬਰਾਬਰ ਹੀ ਹੁੰਦਾ ਭਗਤੇ ਨੇ ਉਹੋ ਆਪਣੇ ਮੂਹਾਂ ਦਾਸ ਬੰਦਦਾ ਨਹੀਂ ਬੰਦ ਠੀਕ ਹੈ ਹਰ ਦਰ ਸੋਹਣ ਅਗ ਉਹ ਹਰ ਦਰਗਾਹ ਦੇ ਵਿੱਚ ਥੋੜਾ ਅੱਗੇ ਜਾਂਦਾ ਹੈ ਸਾਰੇ ਸਵਾਗਤ ਕਰਦੇ ਨੇ ਥੋੜਾ ਲੱਗਦਾ ਸਭ ਨੂੰ ਜਿਲਮੁਖ ਹੋ ਕੇ ਜਾਂਦਾ ਖੁਸ਼ੀ ਨਾਲ ਜਾਂਦਾ ਨੌਵੇਂ ਪਾਸ਼ਾ ਵਾਸਤੇ ਦਸਮ ਪਾਸ਼ਾ ਤਾਂ ਹੀ ਲਿਖਦੇ ਸਿਕਰ ਫੋਰ ਪਿਆਨ ਤੇਗ ਬਹਾਦਰ ਸਿਕੜਿਆ ਕਰੀ ਨਾ ਕਿਨੂ ਹਵਾਨ ਤੇਗ ਬਹਾਦਰ ਕੇ ਚਲਤ ਭਿਓ ਜਗਤ ਕੋ ਸ਼ੋਗ जगद दे बिता शोक पे इथे हाहाकार होया गोरा होया बुरा होया पर है हाय हाय सब जग पियो जय जय जय सुर लोग सुर लोग ने वीर जय जयकार होए साख दा ने सर प्रीत है गुरु आवे हर नाम बनज रंग सिऊं हर नाम ले जावे प्रीत उदी ਸੰਤੋਖ ਖਾਖਾ ਬਗਾ ਹੁੰਦਾ ਉਹ ਵੀ ਸਾਰਿਆਂ ਨਾਲੇ ਪ੍ਰੀਤ ਹੋਰਦੀ ਪਰ ਸੱਚੀ ਪ੍ਰੀਤ ਜਿਹੜੀ ਹੁੰਦੀ ਹੈ ਨਾਲ ਹੁੰਦੀ ਹੈ ਜੋਤ ਨਾਲ ਹਰ ਦਾ ਬੁੱਲ ਜੋਤ ਹੈ ਜੋਤ ਕਰਕੇ ਸਾਰੇ ਨਾਲੇ ਪ੍ਰੀਤ ਹੁੰਦੀ ਹੈ ਉਤੋਂ ਚਾਹੇ ਕਿਸੇ ਨੂੰ ਉਹਦੇ ਕਰਮ ਦੇਖ ਕੇ ਬੁਰਾ ਭਲਾ ਵੀ ਕਹਿੰਦੇ ਹੋਣ ਉਤੋਂ ਉਤੋਂ ਜਿਵੇਂ ਵਿਰੋਧੀ ਨੇ ਬੜ ਮੁਖ ਰੂਪ ਕੁਝ ਪੂਰਾ ਪਰਖਿਆ ਹੋਇਆ ਨਾ ਮਰਬਾਨੀ ਚ ਇਹ ਉਤੋਂ ਉਤੋਂ ਕਿਹਾ ਹੋਇਆ ਹੈ ਦਲ ਉਤੋਂ ਉਤੋਂ ਸਮਝਾਉਣ ਵਾਸਤੇ ਉੱਧਰ ਉਹ ਕਿਹਾ ਹੋਇਆ ਕਹਿੰਦੇ ਬੁਰੇ ਭਲੇ ਸਭ ਤੇਰੇ ਇਹ ਭਲੇ ਨੇ ਬੁਰੇ ਨੇ ਸਭ ਤੇਰੇ ਹੀ ਨੇ ਠੀਕ ਹੈ ਜੀ ਹਾਂ ਪੂਜਨ ਹੁੰਦਾ ਨਾ ਤਨ ਦੇ ਪੂਜਾ ਸਾਡੀ ਕੀ ਹੈ ਅਸੀਂ ਪੂਜਾ ਸੰਸਾਰੀ ਲੋਕ ਕਰਦੇ ਆ ਨਾ ਕੋਈ ਚੀਜ਼ ਚੜਾਵਾ ਜਿਹੜਾ ਚੜਾਉਂਦੇ ਪੂਜਾ ਦਾ ਤਾਂ ਕਹਿੰਦੇ ਆ ਆਦੇ ਵਿੱਚ ਸਾਡੀ ਜਿਹੜੀ ਸਿੱਖਾਂ ਦੀ ਪੂਜਾ ਉਹ ਕੀ ਤਨਮਨ ਅਰਪੁਮ ਪੂਜੀ ਚੜਾਵ ਬਸ ਸਾਡੇ ਕੋਲ ਪੂਜਾ ਨੂੰ ਹੋਈ ਨਹੀਂ ਕੋਈ ਹੋਰ ਕੀ ਪੂਜਾ ਹੋਰੋਂ ਕੀ ਚਾਹੀਦਾ ਹੈ ਜੀ ਗੁਰ ਹਰ ਨਾਮ ਵਣੰਜੈ ਰੰਗ ਕਿਉ ਲਾਹਾ ਹਰ ਨਾਮ ਲੈ ਜਾਵੇ ਹਰ ਨਾਮ ਬੁਣਨ ਦਾ ਹਰ ਨਾਮ ਦਾ ਵਪਾਰ ਕਰਦੇ ਨੇ ਬੰਦੇ ਨੇ ਰੰਗ ਆਹ ਇਹ ਵੀ ਰੰਗ ਚੜ ਜਾਂਦਾ ਜਿਵੇਂ ਰੰਗ ਚੜਦਾ ਹੈ ਇਹੀ ਵਪਾਰ ਸੰਸਾਰ ਛੁੱਟੀ ਜਾਂਦਾ ਨਾਭ ਚ ਸਮਾਈ ਜਾਂਦਾ ਹੈ ਲਾਹਾ ਹਰ ਨਾਮ ਲੈ ਜਾ ਬਸ ਉਹ ਲਾਹਾ ਲੈ ਜਾਂਦਾ ਨਾ ਨਾਮ ਦਾ ਲਾਹ ਖਟ ਕੇ ਜਾਂਦਾ ਠੀਕ ਹੈ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਾਹ ਭਾਵੈ ਗੁਰ ਸਤਗੁਰ ਬੋਲ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਗੁਰ ਸਿੱਖਾਂ ਕੇ ਮਖੋ ਜਲੇ ਹਰਦਰਗਾ ਭਾਵੈ ਗੁਰ ਹੁੰਦੇ ਨੇ ਜਦੋਂ ਦਰਗਾਹ ਜਾਂਦੇ ਨੇ ਸਾਰਿਆਂ ਨੂੰ ਚੰਗੇ ਲੱਗਦੇ ਨੇ ਸਾਰਿਆਂ ਨੂੰ ਸਾਰੇ ਸੋਭਾ ਕਰਦੇ ਗੁਰ ਸਾਟਪੁਰ ਬੋਲ ਹਰ ਰੂਪ ਕਾ ਬਹੁਤ ਕੋਈ ਜਾਣੇ ਤਾਂ ਆ ਜਿਹੜਾ ਢੇਰ ਲੋਨ ਨੂੰ ਗੋਲ ਕਹਿੰਦੇ ਨੇ ਇਹਨੂੰ ਬੇਅੰਤ ਕਹੀਏ ਜਿਹੜਾ ਮੁਕਰੀਦ ਉਹ ਬਹੁਤ ਤਾਂ ਕਹਿੰਦਾ ਨਾ ਪ੍ਰੋਫੈਸਰ ਨੇ ਜੋ ਦਿੱਤਾ ਹੈ ਨਾ ਸਾਾਨੂੰ ਬੀਜਿਆ ਹੋਇਆ ਉਹ ਕਹਿੰਦਾ ਨਾ ਬੇਅੰਤ ਚਾਹੇ ਉਹ ਥੋੜਾ ਹੀ ਹੋਵੇ ਉਹ ਬਹੁੜ ਗੁਰ ਸਤਗੁਰ ਬੋਲ ਹਰਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਜਿੰਨਾ ਮਰਜ਼ੀ ਲਈ ਜਾ ਸਾਂਝ ਕਰਾਵੇ ਵੱਡੇ ਭਾਗਾਂ ਕਰਕੇ ਗੁਰ ਸੇਖ ਜਿਹੜੇ ਵੱਡ ਭਾਗੀ ਸਿੱਖ ਗੁਰ ਸਾਜ ਗੁਰਾਂ ਦੀ ਸਾਂਝ ਕਰਦੇ ਨੇ। ਉਹਦੇ ਆਲੇ ਜਿਹੜੇ ਗੁਰ ਨੇ ਨਾ ਸਤਗੁਰ ਆਲੇ ਗੁਣ ਆਪਣੇ ਨੇ ਉਹ ਗੁਣਾਂ ਦਾ ਬਹੋੜ ਹੈ ਸੰਦੇ ਵਿੱਚ। ਨਾਪਦੇ ਭੋਲਾ ਗੁਦਨ ਗੁਣਾਂ ਦਾ ਬਹੋੜ ਹੈ। ਔਗਣ ਕਿੰਨੇ ਨੇ ਸਾਡੇ ਜੇਤ ਦਾ ਸਮੁੰਦ ਸਾਗਰ ਨੀਰ ਭਰਿਆ। ਗੁਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਸਮੁੰਦਰ ਨਾ ਲਿミਟਡ ਜਿਹਦੇ ਆਲੇ ਦੁਆਲੇ ਬਾਉਂਡਰੀ ਹੋਵੇ ਉਹਨੂੰ ਆਲੇ ਦੁਆਲੇ ਖੁਸ਼ਕਾ ਕੋਈ ਨਹੀਂ ਉਹ ਅਨੰਤ ਹੈ ਇਹ ਫੇਰ ਵੀ ਲਿミਟਡ ਨਹੀਂ ਬਹੁਤ ਜ਼ਿਆਦਾ ਨੂੰ ਅਸੀਂ ਸਮੁੰਦਰ ਸਾਗਰ ਕਹਿੰਦੇ ਉਹ ਬੋਲ ਹੈ ਹਰ ਨਾਮ ਮਤਲਬ ਹੈ ਖਿਆਲ ਆ ਖਾਨਾ ਕਿਸਮ ਦੀ ਗੁਣਾ ਦੀ ਜਨ ਵਰਜੀ ਗੁਣ ਉਹਦੇ ਜ ਉਹਦੇ ਗੁਣ ਕਿੰਨੇ ਨੇ ਪਾਇਆ ਜਾਂਦਾ ਗੁਰਸਿੱਖਾਂ ਕੋ ਹਮ ਵਾਰਿਆ ਜੋ ਬੈਂਧਿਆ ਉੱਠਦਿਆਂ ਸਿੱਖਾਂ ਨੇ ਮਾ ਦੀ ਉਹ ਗੱਲ ਕਰਦੇ ਨੇ ਰਾਮ ਤੇ ਬਿਨਾ ਦੀ ਸੁਰਤ ਹੋਈ ਹਰ ਜਸਤੇ ਬਿਨਾ ਗੁਰਬਾਨੀ ਵਿਚਾਰਤੇ ਬਿਨਾ ਗੁਰਬਾਨੀ ਦੀ ਗੱਲ ਤੇ ਬਿਨਾ ਹੋਰ ਉਹਨਾਂ ਦਾ ਧਿਆਨ ਕਿਸੇ ਪਾਸੇ ਨਹੀਂ ਜਾਂਦਾ ਨਾ ਹੋਰ ਕੋਈ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ ਨਾ ਕੋਈ ਹੋਰ ਗੱਲ ਕਰਦੇ ਦੇ ਦੇਖੋ ਇੱਥੇ ਪ੍ਰਾਪਤੀਆਂ ਕੀ ਨੇ ਉਹ ਗੱਲ ਦੱਸੀਏ ਜਿਆਦਾ ਠੀਕ ਹੈ ਜੀ ਤੇ ਐਵੇਂ ਭਲੇਖੇ ਜਣਾ ਲਿਓ ਬਹੁਤ ਬੜੀਆਂ ਬੜੀਆਂ ਪ੍ਰਾਪਤੀਆਂ ਹਾਂਜੀ ਸੰਤ ਭਗਤ ਸ਼ੁਰੂ ਹੋਈ ਸੀ ਭਗਤ ਤੇ ਗੁਰਸਿੱਖ ਫਿਰ ਇੱਕੇ ਹੋ ਗਏ ਹੈ ਜੀ ਹਾਂਜੀ ਹਾਂ ਗੁਰਸਖ ਭਸਤੇ ਹੁੰਦੇ ਨੇ ਕੁਝ ਨਾ ਠੀਕ ਐ ਇੱਥੇ ਵੀ ਜਿਹੜਾ ਕਾ ਅੱਖਰ ਹੈ ਇਹਦੇ ਪਰ ਟਿੱਪੀ ਲਾ ਕੇ ਇਹ ਗਲਤ ਲਿਖਿਆ ਹੋਇਆ ਕਾ ਲਿਖਿਆ ਹੋਇਆ ਕਾ ਜਾਨਵਰ ਹੈ ਉਹਦਾ ਨਾਮ ਹੈ ਕਾ ਤਾਂ ਹਾਂਜੀ ਕਹਿੰਦੇ ਹਾਂ ਕਾਗ ਜੀ ਨੂੰ ਲਿਖਿਆ ਪਿਆ ਹਾਂਜੀ ਜਿਹੜੇ ਗੁਰਬਾਣੀ ਚ ਕਾ ਨੂੰ ਕਾਗੇ ਲਿਖਿਆ ਤੇ ਐਸੇ ਹੀ ਪੌੜੀ ਵਿੱਚ ਦੋ ਜਗ੍ਹਾਏ ਅੱਖਰ ਦੀ ਗਲਤੀ ਆਈ ਹੈ ਜੀ ਇੱਥੇ 11ਵੀਂ ਪੌੜੀ ਦੀ ਸਮਾਪਤੀ ਹੈ ਜੀ